ਉਮੇਕਾ ਸਾਜ਼ਿਸ਼ ਦੇ ਹਨੇਰੇ ਦਾ ਨਾਸ਼ ਕਰਨ ਵਾਲਾ ਇੱਕ ਸੱਚ ਮਾਇਆ, ਦੁਬਧਾ ਅਤੇ ਸ਼ੈਤਾਨ ਬੇਬੇਕ ਹਿੰਮਤਾ ਦਾ ਉਹ ਆਲਮ ਰਚਾਉਂਦੇ ਹਨ ਜਿਸ ਨਾਲ ਧਰਮ ਅਤੇ ਭਰੋਸੇ ਨਾਲ ਸਾਰੇ ਹੀ ਸਬੰਧ ਟੁੱਟ ਜਾਂਦੇ ਹਨ ਇਹ ਇੱਕ ਵੱਡੀ ਬਦਕਿਸਮਤੀ ਅਤੇ ਦੁਖਾਂਤ ਹੈ ਇਹ ਦੁਖਾਂਤ ਕਾਮਰੇਡੀ ਸੋਚ ਵਾਲਿਆਂ ਉੱਤੇ ਐਸਾ ਵਰਤਿਆ ਕਿ ਜਿਸ ਗੱਲ ਤੋਂ ਉਹਨਾਂ ਨੂੰ ਸ਼ਰਮਸਾਰ ਹੋਣਾ ਚਾਹੀਦਾ ਸੀ ਉਹ ਉਸ ਉੱਤੇ ਫਖਰ ਕਰ ਰਹੇ ਹਨ ਇਹ ਬਦਕਿਸਮਤੀ ਸਦਾ ਹੀ ਉਹਨਾਂ ਨੇ ਸੋਚ ਸਮਝ ਅਤੇ ਮਨੁੱਖੀ ਹਿੱਤਾਂ ਤੋਂ ਕਿਨਾਰਾ ਕਰਕੇ ਇਹੋ ਜਿਹੇ ਹ ਦਲੀਲਾਂ ਆਪਣੀਆਂ ਲਿਖਤਾਂ ਵਿੱਚ ਪੇਸ਼ ਕੀਤੀਆਂ ਹਨ ਜਿਸ ਤੋਂ ਕੋਈ ਸਾਧਾਰਨ ਸੂਝ-ਬੂਝ ਵਾਲਾ ਮਨੁੱਖ ਵੀ ਹੈਰਾਨ ਹੋ ਕੇ ਇਸ ਪ੍ਰਸ਼ਨ ਨੂੰ ਸੰਬੋਧਿਤ ਹੋ ਜਾਂਦਾ ਹੈ ਕਿ ਇਨ੍ਹਾਂ ਕਾਮਰੇਡਾਂ ਦੀ ਬੁੱਧ ਤਾਂ ਪ੍ਰਿਸ਼ਟ ਹੈ ਹੀ ਸੀ ਪਰ ਉਸ ਪ੍ਰਿਸ਼ਟ ਬੁੱਧ ਉੱਤੇ ਇਨ੍ਹਾਂ ਫਖਰ ਕਿਉਂ ਇੰਨੀ ਆਕਰਮਣਿਕ ਬਿਰਤੀ ਕਿਉਂ ਗੁਰਬਾਣੀ ਅਤੇ ਸਿੱਖ ਧਰਮ ਮਨੁੱਖਾ ਮਾਤਰ ਉੱਤੇ ਇਕ ਅਕਾਲ ਪੁਰਖੀ ਕਿਰਪਾ ਹੈ ਗੁਰਬਾਣੀ ਦਾ ਚਾਨਣ ਮਨੁੱਖ ਦੇ ਸਾਰੇ ਹੀ ਪਰਮਾ ਨੂੰ ਮਿਟਾ ਕੇ ਉਸ ਨੂੰ ਉੱਤਮ ਵਿਵੇਕ ਅਤੇ ਸਰਬੱਤ ਦੇ ਭਲੇ ਦੇ ਸਰੂਕਾਰ ਨਾਲ ਸੰਬੰਧਿਤ ਕਰਕੇ ਮਨੁੱਖ ਨੂੰ ਸਾਰਥਕ ਜੀਵਨ ਪ੍ਰਦਾਨ ਕਰਦਾ ਹੈ ਦੂਸਰੇ ਪਾਸੇ ਇਸ ਕਲਿਆਣਕਾਰੀ ਅਤੇ ਸਰਬੱਤ ਦੇ ਭਲੇ ਵਾਲੀ ਜੀਵਨ ਸੇਧ ਦਾ ਵਿਰੋਧ ਕਰਨ ਲਈ ਕਾਮ ਰੈਡੀ ਭੰਬਲ ਪੂਸਿਆਂ ਰਾਹੀਂ ਗੁਰਬਾਣੀ ਦੇ ਅਰਥਾਂ ਨੂੰ ਤੋੜ ਮਰੋੜ ਕੇ ਭਲੇਖਾ ਪੈਦਾ ਕਰਨ ਦਾ ਸਿਰ ਤੋੜੇ ਯਤਨ ਕੀਤਾ ਜਾ ਰਿਹਾ ਹੈ ਇਹ ਦੁਸ਼ਕਾਰਜ ਤਾਂ ਪਿਛਲੇ ਤਿੰਨ ਦਹਾਕਿਆਂ ਤੋਂ ਚੱਲ ਰਿਹਾ ਸੀ ਪਰ ਗੁਰਸਿੱਖਾਂ ਨੇ ਇਸ ਵੱਲ ਬਹੁਤਾ ਧਿਆਨ ਨਾ ਦਿੱਤਾ ਕਿਉਂਕਿ ਉਹ ਮੂਰਖਾਂ ਅਤੇ ਮੂਹ ਰੱਖਿਆਂ ਨਾਲ ਲੁੱਝਣਾ ਨਹੀਂ ਸਨ ਚਾਹੁੰਦੇ ਜਦਕਿ ਇਹਨਾਂ ਦੀਆਂ ਲਿਖਤਾਂ ਅਤੇ ਦਲੀਲਾਂ ਕੁਫਰ ਦੇ ਪਲੰਦੇ ਤੋਂ ਵੱਧ ਕੇ ਹੋਰ ਕੁਝ ਨਹੀਂ ਸਨ ਇਹ ਲੋਕ ਆਪਣੇ ਕਾਰਿਆਂ ਵਿੱਚ ਨਿਤਾਪ੍ਰਤੀ ਅੱਗੇ ਹੀ ਵਧਦੇ ਜਾ ਰਹੇ ਸਨ ਗੁਰਮੁਖ ਸੱਜਣ ਜਾਣਦੇ ਹੋਏ ਵੀ ਚੁੱਪ ਹੀ ਰਹਿਣਾ ਚਾਹੁੰਦੇ ਸਨ ਅਤੇ ਇੱਕ ਉਦਾਸ ਕਰਨ ਵਾਲੀ ਸੱਚਾਈ ਇਹ ਵੀ ਹੈ ਕਿ ਇਨ੍ਹਾਂ ਕਾਮ ਰੈਡੀ ਕਰਤੂਤਾਂ ਪ੍ਰਤੀ ਪੂਰੀ ਨਾਪਸੰਦਗੀ ਦੇ ਬਾਵਜੂਦ ਕੁਝ ਵਿਦਵਾਨ ਜਾਣਬੁੱਝ ਕੇ ਹੀ ਚੁੱਪ ਹਨ ਇਸ ਸਭ ਤੋਂ ਇਸ ਕਾਮ ਰੈਡੀ ਟੋਲੇ ਨੂੰ ਲੱਗਾ ਕਿ ਸ਼ਾਇਦ ਇਹਨਾਂ ਨੂੰ ਠੱਲ ਪਾਉਣ ਦੀ ਯੋਗਤਾ ਅਤੇ ਸਮਰੱਥਾ ਕਿਸੇ ਬੁੱਧ ਵਿਵੇਕ ਵਾਲੇ ਗੁਰਸਿੱਖ ਵਿੱਚ ਹੈ ਹੀ ਨਹੀਂ ਇਹਨਾਂ ਨੇ ਆਪਣੇ ਕੂਫਰ ਦੇ ਵਹਿਣ ਹੋਰ ਵਧਾ ਕੇ ਪਾਣੀ ਨੂੰ ਸਿਰ ਤੋਂ ਉੱਚਾ ਕਰ ਦਿੱਤਾ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ ਅਨੁਸਾਰ ਕੁਝ ਸਿੱਖਾਂ ਦੇ ਹਿਰਦੇ ਬਲੂੰਦਰੇ ਗਏ ਅਤੇ ਉਹਨਾਂ ਕੋਲੋਂ ਹੋਰ ਚੁੱਪ ਅਤੇ ਬੇਧਿਆਨੇ ਰਹਿਣਾ ਅਸੰਭਵ ਹੋ ਗਿਆ ਉਹਨਾਂ ਨੇ ਇਸ ਕੂੜ ਜੁੰਡਲੀ ਦੇ ਕਾਗਜ਼ੀ ਕਿਲੇ ਨੂੰ ਤਬਸਤ ਕਰਨ ਦਾ ਇਰਾਦਾ ਬਣਾ ਕੇ ਇਹਨਾਂ ਦੇ ਕੂੜ ਅਤੇ ਵਾਸਤਵਿਕਤਾ ਦੇ ਸੱਚ ਨੂੰ ਸੰਸਾਰ ਦੇ ਸਾਹਮਣੇ ਲਿਆਉਣ ਦਾ ਇਰਾਦਾ ਬਣਾ ਲਿਆ ਇਨ੍ਹਾਂ ਵਿੱਚੋਂ ਪ੍ਰਮੁੱਖ ਪ੍ਰਮੁੱਖ ਨਾਂ ਕਮਰ ਅਜੀਤ ਸਿੰਘ ਜੀ ਪਟਿਆਲੇ ਵਾਲਿਆਂ ਦਾ ਹੈ ਕਮਰ ਅਜੀਤ ਸਿੰਘ ਜੀ ਗੁਰਮਤ ਬਿਵੇਕ ਦੀਆਂ ਗਹਿਰਾਈਆਂ ਅਤੇ ਉਚਾਈਆਂ ਦਾअनुभव ਪਲੀ ਭਾਂਤ ਰੱਖਦੇ ਹਨ ਗੁਰਮਤ ਬਿਵੇਕ ਦੀ ਦ੍ਰਿੜਤਾ ਉਹਨਾਂ ਦੇ ਦ੍ਰਿਸ਼ਟੀਕੋਣ ਨੂੰ ਝੂਠ ਸੱਚ ਦਾ ਨਬੇੜਾ ਕਰਨ ਲਈ ਯੋਗਤਾ ਪ੍ਰਦਾਨ ਕਰਦੀ ਹੈ ਆਪ ਜੀ ਗੁਰਸਿੱਖੀ ਅਤੇ ਗੁਰਸਿੱਖਾਂ ਪ੍ਰਤੀ ਆਦਰ ਭਰਿਆ ਸਬੰਧ ਅਤੇ ਫਰਜ਼ ਦੇ ਇਹਸਾਨ ਦੇ ਧਾਰਨੀ ਹਨ ਆਪ ਜੀ ਦੀ ਸੂਖਮ ਸੋਚ ਕਾਮਰੇਡੀ ਭੰਬਲ ਪੂਸਾਂ ਵਿਚਲੀ ਮਾੜੀ ਨੀਅਤ ਨੂੰ ਤੁਰੰਤ ਪਹਿਚਾਨ ਲੈਂਦੀ ਹੈ ਅਤੇ ਆਪ ਜੀ ਦਾ ਗੁਰਬਾਣੀ ਦਾ ਅਧਿਐਨ ਕਾਮਰੇਡੀ ਦੀ ਸ਼ੈਤਾਨੀ ਦੀ ਕਾਟ ਲਈ ਗੁਰਬਾਣੀ ਵਿੱਚੋਂ ਦਲੀਲ ਪੇਸ਼ ਕਰਨ ਲਈ ਸਦਾ ਹੀ ਸਮਰੱਥ ਹੈ ਇਹੋ ਕਾਰਨ ਹੈ ਕਿ ਆਪ ਜੀ ਦੀਆਂ ਦਲੀਲਾਂ ਅੱਗੇ ਕਾਮਰੇਡ ਕਾਲਾਫਗਾਨਾ ਤੇ ਕਾਮਰੇਡੀ ਘੱਗਾ ਦੀਆਂ ਦਲੀਲਾਂ ਬਿਲਕੁਲ ਖੋਖਲੀਆਂ ਤੇ ਬਿਵੇਕਹੀਨ ਸਾਬਤ ਹੁੰਦੀਆਂ ਹਨ ਕਮਰ ਅਜੀਤ ਸਿੰਘ ਦੀ ਇਹ ਖੋਜ ਅਤੇ ਕਾਮ ਰੈਡੀ ਸਿੱਖਾਂ ਦੀ ਭੈੜੀ ਸੋਚ ਉੱਤੇ ਤਕੜਾवार ਬਿਲਕੁਲ ਸਮੇਂ ਦੀ ਫੌਰੀ ਲੋੜ ਦੀ ਸਫਲਤਾ ਨਿਰਸੰਦੇਹ ਭਰੋਸੇ ਵਾਲਿਆਂ ਦੀ ਕਿਰਪਾ ਹੈ ਸਿੱਖੀ ਸਦਕ ਨੂੰ ਪ੍ਰਾਪਤ ਹੁੰਦੀ ਹੈ ਗੁਰਸਿੱਖਾਂ ਦਾ ਤਨ ਮਨ ਸ਼ਾਂਤ ਸੁਚੇਤ ਅਤੇ ਵਿਵੇਕਚ ਰੰਗਿਆ ਰਹਿੰਦਾ ਹੈ ਉਹਨਾਂ ਦਾ ਭਰੋਸਾ ਉਹਨਾਂ ਦੀ ਸ਼ਕਤੀ ਹੈ ਅਤੇ ਇਸ ਸ਼ਕਤੀ ਨਾਲ ਉਹ ਹਰ ਪ੍ਰਕਾਰ ਦੇ ਸੰਕਟਾਂ ਦਾ ਸਾਹਮਣਾ ਕਰਕੇ ਉਸਨੂੰ ਸਦਾ ਲਈ ਮਿਟਾਉਣ ਦੇ ਸਮਰੱਥ ਹਨ ਗੁਰੂ ਨਿੰਦਕ ਸਦਾ ਤੋਂ ਹੀ ਦੁਸ਼ਟ ਰੂਪਿਤ ਝੱਕ ਮਾਰਦੇ ਰਹੇ ਹਨ ਇਹ ਰੌਲਾ ਬਹੁਤ ਪਾਉਂਦੇ ਹਨ ਇਸ ਵਾਸਤੇ ਵਧੇਰੇ ਸੁਣਾਈ ਪਰ ਇਹਨਾਂ ਦੇ ਢੋਲ ਠਮੱਕੇ ਖੋਖਲੇ ਹਨ ਅਤੇ ਕਿਸੇ ਵੀ ਗੁਰਮੁਖ ਦੀ ਦਲੀਲ ਅੱਗੇ ਇਹਨਾਂ ਦਾ ਪੂਰਨ ਨਾਸ਼ ਹੋ ਜਾਂਦਾ ਹੈ ਇਹ ਲੋਕ ਮਨੁੱਖਤਾ ਦੇ ਵੱਡੇ ਅਪਰਾਧੀ ਹਨ ਕਿਉਂਕਿ ਇਹ ਮਨੁੱਖ ਦੀ ਸਭ ਤੋਂ ਵੱਡੀ ਦੌਲਤ ਜੋ ਰੱਬੀ ਭਰੋਸਾ ਹੈ ਉਸ ਤੋਂ ਮਨੁੱਖ ਨੂੰ ਹੀਣਾ ਕਰਨਾ ਚਾਹੁੰਦੇ ਹਨ ਗਿਆਨ ਅਤੇ ਭਰੋਸੇ ਤੋਂ ਬਿਨਾਂ ਮਨੁੱਖ ਇੱਕ ਖਾਲੀ ਭਾਂਡਾ ਹੈ ਜੋ ਸ਼ੋਰ ਦੇ ਅੰਦਰ ਹੱਥ ਪਾ ਕੇ ਕੁਝ ਕੱਢ ਲੈਣ ਦੀ ਆਸ ਰੱਖੀਏ ਤਾਂ ਹੱਥ ਕੁਝ ਵੀ ਨਹੀਂ ਆਉਂਦਾ ਕਿਉਂਕਿ ਉੱਥੇ ਕੁਝ ਹੁੰਦਾ ਹੀ ਨਹੀਂ ਹੈ ਇੱਕ ਖਾਲੀ ਪੀਪੇ ਖੜਕਦੇ ਬਹੁਤ ਹਨ ਇਹਨਾਂ ਦੀ ਖੜਕਾਰ ਅਤੇ ਖੜਾਕ ਕੁਝ ਸਿੱਧੇ ਸਾਦੇ ਲੋਕਾਂ ਨੂੰ ਗੁੰਮਰਾਹ ਕਰ ਸਕਦੀ ਹੈ ਸਿੱਧੇ ਸਾਦੇ ਅਤੇ ਆਮ ਮਨੁੱਖ ਦੇ ਹੱਕਾਂ ਦੀ ਰੱਖਿਆ ਲਈ ਗੁਰਸਿੱਖ ਸਦਾ ਹੀ ਹਾਜ਼ਰ ਅਤੇ ਤਿਆਰ ਬਰ ਤਿਆਰ ਰਹਿੰਦੇ ਹਨ ਕਿਉਂਕਿ ਉਹ ਅਕਾਲ ਪੁਰਖੀ ਖਾਲਸਾ ਫੌਜ ਦੇ ਸੰ ਸਿਪਾਹੀ ਹਨ ਜਿਨ੍ਹਾਂ ਕੋਲ ਬੁੱਧ ਵਿਵੇਕ ਅਤੇ ਸ਼ਸਤਰ ਸ਼ਬਦਾਂ ਰਾਹੀਂ ਚੱਲਦੇ ਹਨ ਇਸ ਕੂੜ ਪ੍ਰਚਾਰ ਅਤੇ ਭੁਲੇਖੇ ਦੇ ਵੱਡੇ ਤੋਂ ਵੱਡੇ ਕਿਲੇ ਦੀ ਇੱਟ ਨਾਲ ਇੱਟ ਵਜਾਉਣ ਲਈ ਵਿੱਚ ਸਮਰੱਥ ਹਨ ਨਾਸਤਿਕਤਾ ਇੱਕ ਅਕਰਤਕਣਤਾ ਹੈ ਜੋ ਅਕਾਲ ਪੁਰਖ ਪ੍ਰਤੀ ਹੈ ਅਕਾਲ ਪੁਰਖ ਦਿਆਲੂ ਹੈ ਜੋ ਦੋ ਤੇ ਪਾਪੀਆਂ ਦੇ ਗੁਨਾਹਾਂ ਅਤੇ ਪਾਪਾਂ ਦੀ ਸਜ਼ਾ ਦੇਣ ਦੇ ਥਾਂ ਉਹਨਾਂ ਨੂੰ ਹੋਰ ਸਮਾਂ ਦਿੰਦਾ ਹੈ ਤਾਂ ਕਿ ਉਹ ਆਪਣੀ ਭੈੜੀ ਸੋਚ त्याग ਕੇ ਸੁਧਰ ਜਾਣ ਜਦੋਂ ਇਹ ਦੁਸ਼ਟ ਕੂੜ ਵਿੱਚ ਗੜੁੱਚ ਝੱਖ ਮਾਰਨ ਦੀ ਆਵਾਜ਼ ਆਉਂਦੇ ਤਾਂ ਗੁਰਮਤ ਵਿਵੇਕ ਦੇ ਜਾਹੋ ਜਲਾਲ ਜਗ ਮੰਗਾਉਂਦਾ ਹੋਇਆ ਕੋਈ ਬਬੇਕੀ ਸੂਰਾ ਕੰਵਰ ਅਜੀਤ ਸਿੰਘ ਵਰਗਾ ਪ੍ਰਗਟ ਹੁੰਦਾ ਹੈ ਕੰਵਰ ਅਜੀਤ ਸਿੰਘ ਜੀ ਨੇ ਅਜੇ ਤੱਕ ਜੋ ਕੁਝ ਵੀ ਲਿਖਿਆ ਉਹ ਸਿੱਖ ਭਾਈਚਾਰੇ ਲਈ ਬਹੁਤ ਹੀ ਜ਼ਰੂਰੀ ਸੀ ਪੰਜਾਬ ਜਿਹੜਾ ਕਿ ਜਿਉਂਦਾ ਹੀ ਗੁਰੂਆਂ ਦੇ ਨਾਮ ਤੇ ਹੈ ਉਸੇ ਹੀ ਪੰਜਾਬ ਵਿੱਚ ਗੁਰਸਿੱਖਾਂ ਦੇ ਮਨ ਵਿੱਚ ਗੁਰਬਾਣੀ ਬਾਰੇ ਭੁਲੇਖਾ ਅਤੇ ਦੁਬਧਾ ਪੈਦਾ ਕਰਨ ਦੀ ਸਾਜ਼ਿਸ਼ ਇਹਨਾਂ ਕਾਮਰੇਡਾਂ ਨੇ ਵੱਡੇ ਪੱਧਰ ਉੱਤੇ ਰਚ ਦਿੱਤੀ ਸੀ ਇਹਨਾਂ ਦੇ ਖੋਲਣ ਲਈ ਗੁਰੂ ਕੇ ਕਮਰ ਅਜੀਤ ਸਿੰਘ ਜੀ ਨੂੰ ਸਮਰਥਾ ਬਖਸ਼ੀ ਅਤੇ ਮੈਦਾਨ ਵਿੱਚ ਉਤਾਰਿਆ ਉਹਨਾਂ ਨੇ ਪੂਰੀ ਲਗਨ ਨਾਲ ਅਦੁੱਪਤ ਲਿਖਤਾਂ ਪੰਥ ਨੂੰ ਪ੍ਰਸਤੁਤ ਕੀਤੀਆਂ ਜਿਸ ਨਾਲ ਕੂੜ ਦੀ ਹਨੇਰੀ ਨੂੰ ਠੱਲ ਪੈ ਗਈ ਅਤੇ ਨਾਲ ਹੀ ਇਹ ਸ਼ੈਤਾਨੀ ਕੂਪਤਾ ਦੁਬਧਾ ਦਾ ਪਸਾਰਾ ਅਤੇ ਮਾਇਆ ਦਾ ਜਾਲ ਆਪਣੀ ਹੋਂਦ ਹੀ ਖਤਮ ਕਰ ਬੈਠੇਗਾ ਕਮਰ ਅਜੀਤ ਸਿੰਘ ਜੀ ਦਾ ਇੱਕ ਵੱਡਾ ਉਪਕਾਰ ਹੈ ਕਿਉਂਕਿ ਆਪ ਜੀ ਦੀ ਇਹ ਪੁਸਤਕਾਂ ਪੜ੍ਹ ਕੇ ਆਮ ਗੁਰਸਿੱਖ ਗੁਰਸਿੱਖੀ ਵਿੱਚ ਦ੍ਰਿੜ ਹੋ ਕੇ ਕਾਮਰੇਡੀ ਕੁਸਿੱਖਾਂ ਪ੍ਰਤੀ ਸੁਚੇਤ ਹੋ ਕੇ ਸਿੱਖੀ ਸੱਚੇ ਭਰੋਸੇ ਵਿੱਚ ਦ੍ਰਿੜ ਰਹੇਗਾ ਕਾਮਰੇਡੀ ਕੁਸਿੱਖਾਂ ਨੇ ਪ੍ਰਮੁੱਖ ਪੰਥ ਕਿੰਤੂ ਪਰੰਤੂ ਹੀ ਨਹੀਂ ਕੀਤਾ ਬਲਕਿ ਉਨਾਂ ਉੱਤੇ ਕਈ ਪ੍ਰਕਾਰ ਦੇ ਦੋਸ਼ ਮੜਨ ਦਾ ਯਤਨ ਵੀ ਕੀਤਾ ਗੁਰਬਾਣੀ ਕੇ ਗੁਰਬਾਣੀ ਦੀ ਸਪਿਰਟ ਵਿਰੁੱਧ ਪੇਸ਼ ਕਰਨ ਦੀ ਕੋਝੀ ਸਾਜ਼ਿਸ਼ ਕੀਤੀ ਗੁਰਮਤ ਰਹਿਤ ਮਰਿਆਦਾ ਇਹੋ ਜਿਹੇ ਝੱਖ ਮਾਰਦਿਆਂ ਹੋਇਆਂ ਇਹਨਾਂ ਨੂੰ ਗੁਰਮਤ ਸੋਚ ਵਿੱਚ ਕਦੇ ਵੀ ਕੋਈ ਵੀ ਚੰਗੀ ਗੱਲ ਨਜ਼ਰ ਨਹੀਂ ਆਈ ਕਿ ਇਹ ਅਗਲੋਂ ਅੰਨਿਆਂ ਦਾ ਕਾਰਨ ਨਹੀਂ ਹੈ ਦੁਨੀਆ ਭਰ ਦਾ ਹਨੇਰਾ ਆਪਣਾ ਸਾਰਾ ਜੋਰ ਲਾ ਕੇ ਇੱਕ ਛੋਟੇ ਜਿਹੇ ਦੀਵੇ ਦੀ ਰੋਸ਼ਨੀ ਦਾ ਖਾਤਮਾ ਨਹੀਂ ਕਰ ਸਕਦਾ ਬਲਕਿ ਹਨੇਰਾ ਆਪ ਦੀ ਪੂਰੀ ਤਾਕਤ ਵਰਤ ਕੇ ਵੀ ਉਸ ਛੋਟੇ ਜਿਹੇ ਦੀਵੇ ਦੇ ਕੋਲ ਆਪਣਾ ਵਜੂਦ ਨਹੀਂ ਰੱਖ ਸਕਦਾ ਇਸੇ ਤਰ੍ਹਾਂ ਹੀ ਕਮਰ ਅਜੀਤ ਸਿੰਘ ਜੀ ਨੇ ਇਸ ਪੁਸਤਕ ਨਾਲ ਇੱਕ ਵਾਰ ਫਿਰ ਝੱਕ ਮਾਰਨ ਵਾਲੇ ਦੁਸ਼ਟਾਂ ਨੂੰ ਉਹਨਾਂ ਦੀ ਅਸਲੀਅਤ ਸਮਝਾ ਕੇ ਉਹਨਾਂ ਨੂੰ ਉਹਨਾਂ ਦੇ ਟਿਕਾਣੇ ਪਹੁੰਚਾ ਦਿੱਤਾ ਹੈ ਇਹ ਬਦਕਿਸਮਤ ਲੋਕ ਅਜੇ ਵੀ ਗੁਰੂ ਘਰੋਂ ਬਖਸ਼ੇ ਜਾ ਸਕਦੇ ਹਨ ਜੇ ਇਹ ਤੌਬਾ ਕਰਕੇ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰਬਾਣੀ ਦੇ ਸੱਚੇ ਵਿਵੇਕ ਦੇ ਧਾਰਨੀ ਬਣ ਜਾਣ ਸ਼ੁਕਰਾਨੇ ਅਤੇ ਵਿਧਾਈ ਸਹਿਤ ਕਰਮਜੀਤ ਸਿੰਘ ਔਜਲਾ ਜਨਰਲ ਸਕੱਤਰ ਸ਼੍ਰੋਮਣੀ ਪੰਜਾਬੀ ਲੇਖਕ ਸਭਾ ਲੁਧਿਆਣਾ